ਸੇ ਲੋਕ ਮਹੱਲਾ ਤੀਜਾ ਗੁਰ बिन ਗਿਆਨ ਨਾ ਹੋਵਈ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੋਣੇ ਮਨ ਮੁਖੀ ਜਾਸਨ ਜਨਮ ਗਵਾਏ ਬਸ ਸਾਰੀ ਬੜਿਆਈ ਨਾਮ ਦੀ ਜਿਹੜੇ ਗੁਰਮੁਖੀ ਨੇ ਔਰ ਮਨਮੁਖੀ ਨੇ ਗੁਰਮਖਾ ਕੋਲ ਨਾਮ ਹੈ ਮਨਮੁਖੀ ਨਾਮ ਤੋਂ ਬਿਨਾਂ ਜਨਮ ਗਵਾ ਕੇ ਚਲੇ ਜਾਂਦੇ ਨੇ ਯਾਖਣ ਜਨਮ ਕੋ ਆਏ ਜਿਹੜੇ ਗੁਰਮਖਣਾਂ ਆ ਉਹ ਲਾਹ ਲੈ ਜਾਂਦੇ ਬਸ ਦੁਆਨ ਦੇ ਵਿਚਾਲੇ ਗੱਲ ਚੱਲਦੀ ਜਾਂਦੀ ਸਾਰੀ ਗੁਰਬਾਣੀ ਦੀ ਤੇ ਗਿਆਨ ਦਾ ਸਰੋਤ ਗੁਰ ਹੈ ਜੀ ਗੁਰ बिन ਗਿਆਨ ਨਾ ਹੋਵੇ ਨਾ ਸੁਖ ਵਸੇ ਮਨ ਆਏ ਗੁਰ ਤੇ ਸਤਗੁਰ ਤੇ ਬਿਨਾਂ ਦਾ ਗਿਆਨ ਮਿਲਣਾ ਹੀ ਨਹੀਂ ਕਿਤੋਂ ਨਾ ਸੁਖ ਹੋਣ ਗੁਰਮਖਣ ਐ ਸਤਗੁਰ ਦਾ ਗਿਆਨ ਲੈਣਾ ਤੇ ਸੁਖ ਨੂੰ ਮਿਲੇ ਜਾਣ ਨਾਲ ਬੰਦ ਰੂਹੀ ਹੋਰਾਂ ਦਾ ਹੋਏ ਗੱਲ ਜਿਹੜੇ ਗੁਰ ਮਨੁੱਖ ਨੇ ਉਹਨਾਂ ਨੇ ਗੁਰ 봉 ਨੂੰ ਮੰਨਣਾ ਨਹੀਂ ਉਹ ਲੈ ਆਸਾਮ ਨਹੀਂ ਮੰਨਣਾ ਉਜਿਤਾਂ ਕਰਨੀ ਨਹੀਂ ਅਰਥ ਵਿਗਾੜਨ ਨਹੀਂ ਉਹ ਗੀ ਇਹ ਜਿਹੜੀ ਗੱਲ ਦੀ ਦੀ ਆ ਉਹ ਕੋਈ ਲਾਭ ਨਹੀਂ ਉਸ ਇੱਕ ਅੱਖਰ ਨੂੰ ਵੀ ਇਹ ਮੰਨ ਲਈਏ ਮੰਨਣ ਦੇ ਵਿੱਚ ਕੁਝ ਮਿਲਣਾ ਬੈਸ ਕਰਦੇ ਕੁਝ ਨਹੀਂ ਬਣਦਾ ਕਿਸੇ ਨੂੰ ਨਾ ਵੜਿਆ ਨਾ ਵੜੇ ਬੈਸ ਕਰਕੇ ਤਾਂ ਜਿਹੜੀ ਬੁੱਢੀ ਪੈਰੀ ਉਹਦਾ ਵੀ ਨਾਸ ਹੋ ਜਾਂਦਾ ਖੋਜੀ ਉਪਜਾ ਖੋਜ ਕਰਦੇ ਨੇ ਇੱਕ ਦੂਰੇ ਨਾਲ ਮਿਲ ਕੇ ਰਲ ਕੇ ਬੈਠਦੇ ਨੇ ਵਿਚਾਰ ਕਰਦੇ ਨੇ ਵਿਚਾਰ ਕਰਨਾ ਖੋਜ ਕਰਦੇ ਨੇ ਉਹ ਬੈਸ ਨਹੀਂ ਕਰਦੇ ਮੰਨਦੇ ਨੇ ਆਪਣਾ ਜਨਮ ਸਫਲਾ ਕਰ ਲਾਂਗੇ ਮਨੁੱਖ ਨੂੰ ਖਨਨ ਬਾਇਕ ਕਰ ਰਹੇ ਨੇ ਜਲ ਬਗਵਾ ਕੇ ਕਿਹਦੇ ਹਾਂਜੀ ਮਹੱਲਾ ਤੀਜਾ ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਮਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਖੋਜਦੇ ਰਹਿੰਦੇ ਨੇ ਉਹ ਸਾਰੇ ਜਿਹੜੇ ਸਮਾਦੀ ਲਾਉਂਦੇ ਨੇ ਨਾ ਸਿੱਧ ਉਹ ਵੀ ਤੁਰਕੀ ਮਲਨੀ ਨਾਲੇ ਜੁੜਨਾ ਚਾਹੁੰਦੇ ਸੀ ਪਰ ਜੁੜਨੇ ਵਿਚਾਰੇ ਕਿੱਥੋਂ ਗਿਆਨ ਤੋਂ ਮੈਨਾਂ ਕਿਵੇਂ ਜੁੜਦੇ ਉਹ ਗਿਆਨ ਪਹਿਲਾਂ ਲੈਂਦੇ ਤਾਂ ਧਿਆਨ ਜੁੜ ਜਾਂਦਾ ਤੁਰਕੀ ਬਾਣੀ ਨਾਲ ਗਿਆਨ ਨਹੀਂ ਲਿਆ ਬਾਣੀ ਕਾ ਲਾਇਆ ਸੀ ਤਾਂ ਤਨ ਪਾਗਤ ਸਾਧ ਜਨ ਨੂੰ ਵਿਵਾਰ ਗੁਣ ਗਾਇ ਢੁਣੀ ਜਨ ਬਣਦੇ ਹੋ ਆ ਗੁਰਬਾਣੀ ਦੇ ਹਰ ਗੁਣ ਗਾਉਣੇ ਤਾਂ ਗੁਣੇ ਤੇ ਤਾਲਣ ਕਰਦੇ ਫਿਰ ਉਹ ਜਬ ਤੱਕ ਪਹੁੰਚਿਆ ਜਾਣਾ ਸੀਗਾ ਇਹਦਾ ਕੰਮ ਕੀਤਾ ਨਹੀਂ ਇਹੀ ਦੱਸਿਆ ਸੀ ਗੁਰੂ ਨਾਨਕ ਦੇਵ ਜੀ ਦਾ ਵੀ ਆਧਿਕਾ ਉਸ ਨਾਮ ਨਾਲ ਜੁੜਨ ਦਾ ਸ਼ਬਦ ਨਾਲ ਆ ਤੁਹਾਡੇ ਵਾਲਾ ਤੁਸੀਂ ਆਪਣੇ ਸਰੀਰ ਜੁੜੇ ਹੋ ਸਾਹ ਭੋਜਨ ਪਾਚਣ ਪਛਦਾ ਉਹ ਆਵਾਜ਼ ਆਉਂਦੀ ਹੈ ਇਹ ਦੋਨੋਂ ਜੁੜੇ ਹੋਏ ਨੇ ਸਰੀਰ ਨਾਲ ਇਹ ਤਾਂ ਮਾਇਆ ਦੀ ਆਵਾਜ਼ ਹੈ ਨਹੀਂ ਅਨੋ ਆਵਾਜ਼ ਉਹਦੇ ਉੱਤੇ ਉੱਤੇ ਸਰੀਰ ਦਾ ਕੀ ਤੂੰ ਉੱਤੇ ਗੱਲ ਕਰੋ। ਮਾਇਆ ਤੋਂ ਉੱਠ ਕੇ ਗੱਲ ਕਰੋ। ਠੀਕ ਹੈ ਜੀ। ਦੱਸਿਆ ਸੀ ਗੁਰਬਾਣੀ ਨੂੰ ਸਮਝੋ ਵਿਚਾਰੋ ਫਿਰ ਤੂੰ ਪਤਾ ਲੱਗੂ ਉਹ ਸ਼ਬਦ ਕੀ ਹੈ। ਤਾਂ ਕੇ ਜੁੜੋਗੇ ਪਰ ਉਹਨਾਂ ਨੇ ਮੰਨਿਓਂ ਦੀ ਗੱਲ। ਹਾਂ ਬਿਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਇ। ਸਤਗੁਰ ਬੇਬੇ ਮੰਨਦਾ ਕਿ ਜene ਨਾਮ ਨਹੀਂ ਪਾਇਆ ਸਤਗੁਰ ਨਾਨਕ ਜੀ ਆਈ ਸੀ ਸਿੱਧਾ ਨੂੰ ਦੇਣਾ ਉਹ ਸਤਗੁਰ ਨਾਨਕਾ ਗਿਆ ਸੀ ਸਿੱਧਾ ਨੂੰ ਨਾਮ ਦੇਣਾ ਪਰ ਪਾਇਆ ਇਹ ਵੀ ਕਹਿਤਾ ਸਤਗੁਰ ਤੇ ਬਿਨਾਂ ਕਿਸੇ ਨੇ ਪਾਇਆ ਨਹੀਂ ਠੀਕ ਹੈ ਫਿਰ ਲੈਣੇ ਨੇ ਕਿ ਪਾਇਆ ਸਤਗੁਰ ਤੋਂ ਪਾਇਆ ਨਾ ਪਾਇਆ ਨਾ ਗੁਰੂਆਂ ਨੇ ਕਿਤੇ ਸਤਗੁਰ ਤੇ ਪਾ ਉਹਨੇ ਜਿਹਨੇ ਪਾਉਣਾ ਸੀ ਪਾ ਲਿਆ ਜੀ ਨਹੀਂ ਪਾਇਆ ਉਹਦੀ ਮਰਜ਼ੀ ਉਹਨਾਂ ਦੇ ਕਰਮਾਂ 'ਚ ਨਹੀਂ ਸੀਗਾ ਗੁਰਮੁਖ ਮਿਲੇ ਮਿਲਾਏ ਗੁਰਮੁਖ ਮਿਲਣਾ ਮਲਾਏ ਗੁਰਮੁਖ ਬਣਦੇ ਨੇ ਪਰ ਮਸੂੰਦਾ ਸਤਗੁਰਾ ਹੈ ਸਤਗੁਰ ਵੀ ਵੀ ਰਾਹ ਪਹਿਲਾਂ ਹੋਵੇ ਤਿਆਗ ਲਈਦਾ ਗੁਰਮੁਖ ਪਹਿਲਾਂ ਰਾਹ ਜੇ ਗਲਤ ਹੋਵੇ ਤਿਆਗ ਦਿੰਦੇ ਨੇ ਇਹਦਾ ਨਾਟਾ ਹੈ ਮਨਮੁਖ ਬਿਨ ਨਾਮੇ ਪੈਨਣ ਖਾਣ ਬਾਦ ਹੈ ਤ੍ਰਿਗ ਸਿੱਧੀ ਤ੍ਰਿਗ ਕਰਮਾਤ ਆਈ ਜੀ ਕਰਾਮਾਤਾਂ ਸਿੱਧੀਆਂ ਨੇ ਕਿ ਜਿਹਨੇ ਪ੍ਰਚਾਰ ਕਰ ਰਿਹਾ ਛੇੜ ਗਿਆ ਹੈ ਸਭ ਬਕਵਾਸ ਹੈ ਸਭ ਬਿਨਾ ਨਾਮ ਤੇ ਪਹਿਨਨ ਖਾਂ ਸਾਰੇ ਇਹ ਬਾਦ ਹੈ ਬਹੁਤ ਲੋੜਾਂ ਨੇ ਤਾਂ ਤੁਸੀਂ ਆਪਣੇ ਹੱਥ ਪੈਰ ਕਰ ਕੰਮ ਸਭ ਕਰੋ ਇਹਦੇ ਨਾਲ ਪੂਰੀਆਂ ਹੋ ਜਾਣਗੀਆਂ ਆਤਮਾ ਦੀ ਹੋਣਾ ਕਿ ਤਾਊਗੀ ਉਹ ਆਤਮਾ ਦੀ ਕੋਈ ਨਹੀਂ ਅਸਲ ਇਹ ਨਰਿੰਦਰ ਨਾਲ ਨਾਲ ਬਲੂਗੀ ਤੇ ਤੀਰ ਨਾਲ ਨਾਲ ਉੱਥੋਂ ਵਾਟਾਂ ਦੀ ਖਰਾਸ ਮਿਲੂਗੀ ਫਿਰ ਫਾਰ ਦੇ ਵਿੱਚ ਜੇ ਰਿਧੀ ਖਰਾਸ ਮਿਲੂ ਇਹ ਤਾਂ ਸਾਨੂੰ ਵੇਲਤ ਕਰਨੀ ਪਊਗੀ ਤਰੇਗ ਸਿੱਧੀ ਤਰੇਗ ਪੀਣ ਵਾਸਤੇ ਹੀ ਨੇ ਨਾ ਜ਼ਿੰਦਗੀ ਤੁਸੀਂ ਰਿਧੀਆਂ ਸਿੱਧੀਆਂ ਗਵਾਤੀ ਤੇਗਾ ਐਸੇ ਜੀਵਨ ਦੇ ਤੁਹਾਡੇ ਤੇਰਾ ਵੀ ਵੇਟ ਭਰ ਲੈਂਦਾ ਕਾਹਦਾ ਤੁਸੀਂ ਕੰਮ ਕੀਤਾ ساری ਜ਼ਿੰਦਗੀ ਰੋਟੀ ਵਾਸਤੇ ਸ੍ਰੀ ਰਾਮ ਤੇ ਗੀਤਾ ਸਾ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਸਿੱਧੀ আর ਕਰਮਾਤ ਕੀ ਹੈ ਜਿਹੜੀ ਚਿੰਤਾ ਮੁਕਤ ਕਰਦੇ ਵੇ ਨਾ বস্তু ਪ੍ਰਾਪਤੀ ਉਹੀ ਸਿੱਧੀ ਉਹੀ ਕਰਮਾਤ ਹੈ ਚਿੰਤਾ ਤੋਂ ਮੁਕਤੀ ਨਾਮ ਤੋਂ ਵੀ ਉਹਦੀ ਹੁੰਦੀ ਨਾਮ ਤੋਂ ਬਿਨਾ ਚਿੰਤਾ ਮੁਕਤ ਨਹੀਂ ਹੋ ਸਕਦਾ ਆਦਮੀ। ਨਾਮ ਦੀ ਧਾਤੀ ਸਿੱਧੀ ਹੈ, ਨਾਮ ਹੀ ਦੀ ਧਾਤੀ ਕਰਾਮਾਤ ਹੈ। ਹੋਰ ਕੁਝ ਕਰਾਮਾਤ ਸੰਸਾਰ ਨਾਮ ਤੋਂ ਬਿਨਾਂ। ਇਹ ਸਿੱਧੀ ਹੈ। ਜੁੱਤੀ ਨਾਮ ਰੜਾ ਸੋਜੀ। ਨਾਮ ਦੀ ਸੋਜੀ ਹੋਣੀ ਹੈ ਸਭ ਹੋਣੀ ਹੈ। ਸਮਝ ਨਾਲ ਮਨ ਬਦਲ ਜੇ। ਗਿਆਨ ਵੱਡਾ ਉਹਦੇ ਨਾਲ ਕਰਾਮਾਤ ਕੀ ਹੋਣੀ ਹੈ? ਗਿਆਨ ਦਾ ਵੱਡਾ ਰਹੇ। ਇਹ ਸਿੱਧੀ ਹੈ, ਇਹ ਕਰਾਮਾਤ ਹੈ। ਵੇਖੀ ਸਮਝਾਇ ਹੀ ਕਰਾਮਾਤ ਸਮਝ ਤੋਂ ਉੱਪਰ ਕਰਾਮਾਤ ਸੁਣwidehat ਖਈਂ ਅਚਿੰਤ ਕਰੇ ਜਿਸ ਦਾਤ ਅਚਿੰਤ ਕਰ ਦੂਵੇ ਦਾਤ ਹੈ ਚਿੰਤ ਕਰ ਦਿੰਦੀ ਹੈ ਇਹ ਨਾਮ ਜਿਹੜਾ ਗਿਆਨ ਹੈ ਇਹੀ ਤਾਂ ਚਿੰਤਾ ਮੂਤ ਕਰੂਗਾ ਸਾਧੂ ਇਹ ਦਾਤ ਹੈ ਕਰਨ ਵਾਲੀ ਹੈ ਹੋਰ ਕੋਈ ਬਾਤ ਉਹ ਸਿੱਧ ਜੇ ਤੁਹਾਨੂੰ ਬਾਕੀ ਅਚਰਤਾ ਰਿਤੇ ਬੜੇ ਬੜੇ ਜਿਹਦੀਸੇ ਲੋਗ ਇਨ ਕੋ ਵਿਆਪਕ ਜਿੰਦਾਰ ਹੋਗ ਤੁਹਾਨੂੰ ਜਾਰੀ ਦਾ ਕਿ ਤਦਾ ਕਾਰਨ ਗੁਰਮੁਖ ਹਰ ਨਾਮ ਮਨ ਵਸੈ ਇਹ ਸਿੱਧ ਨਾਮ ਦੇ ਚੋਂ ਕਿ ਇਹ ਉਹਨਾਂ ਕੋ ਸਿੱਧੀ ਗੁਰਮਖਾ ਨੇ ਇਸ ਨੂੰ ਸਿੱਧੀ ਬਣਿਆ ਐ ਇਸੇ ਤਰ੍ਹਾਂ ਮਾਸ ਬਣਿਆ ਗੁਰਮਖਾ ਦੀ ਕਰਮਾਤ ਅਰ ਸਿੱਧੀ ਕੋਈ ਹੈ ਨਾਮ ਦੀ ਪ੍ਰਾਪਤੀ ਇੱਦਿ ਦਾ ਇੱਕ ਵਚਨ ਹੈ ਸਾਡਾ ਇਹਦਾ ਅਰਥ ਹੈ ਸੋਜੀ ਸੋਜੀ ਹੀ ਕਰਾਮਾਤ ਹੈ ਬਾਹ ਅਸਮਾਨ ਬਦਲ ਜਾਂਦਾ ਸਭ ਕੁਝ ਬਦਲ ਜਾਂਦਾ ਮਨ ਮਾਇਆ ਦਾ ਬਹੁਤ ਛੱਡ ਦਿੰਦਾ ਜਿਹੜਾ ਬੈਰ ਵਿਰੋਧ ਅੰਦਰੋਂ ਖੋ ਦਿੰਦਾ ਤਾਂ ਗ੍ਰੋਧ ਖਤਮ ਹੋ ਜਾਂਦਾ ਤਾਂ ਪ੍ਰੋਧ ਲੋਭ ਮੋਹ ਊੜ ਵਿਕਾਰ ਮਾਹ ਲੋਭ ਪ੍ਰੋਧ ਜੁਗਤ ਦੇ ਹੰਲੇ ਜਨਮ ਨਾ ਕੋ ਰਾਖ ਲਿਓ ਆਪਣਾ ਕਰਮ ਜਾਂ ਉਹਦੀ ਕਿਰਪਾ ਹੁੰਦੀ ਹੈ ਨਾਮ ਵਰਦਾਾਰੇ ਨਸ਼ਾ ਹੋ ਜਾਂਦਾ ਇਹਨਾਂ ਨੂੰ ਪਰ ਇਹ ਕਰਾਮਾਤ ਐਤੋ ਬੜੀ ਕਰਾਮਾਤ ਕੀ ਹੋਵੇਾਰੇ ਬੁਕਾਲਾ ਨਾ ਨਸ਼ਾ ਹੋ ਜਾਣਾ ਕਿਰਪਾ ਤੋਂ ਮੁਕਤ ਹੋ ਜਾਣਾ ਬੰਦਾ ਰੁਕ ਜਾਂਦਾ ਇਹਦੇ ਪਾਸੇ ਪ੍ਰਤੀਗਿਆ ਜੋਗੀ ਨਹੀਂ ਵਧੀ ਜਾਉਂਦੀ ਮਨ ਕਬੂਲ ਨਹੀਂ ਆਇਆ ਬੰਨ ਜੀਤੇ ਜੱਗ ਜੀਤੇ ਜਿਹਨੇ ਮਨਵਾਟ ਚੱਲਿਆ ਉਹਨੇ ਸੰਸਾਰ ਦੇ ਤਲੇ ये तो बड़ी करामाती हो ये तो बड़ी सिद्धि की हो कुछ नहीं हो सकता सब बकवास है बस बहुत बकवास का बेटा ठीक है जी पौड़ी हम हर प्रभु खसम के नित गावें हर गुण छंता हर कीर्तन करें हर जस सुने तिस कमल हम ठाडी ਹਰ ਪ੍ਰਭ ਖਸਮ ਕੇ ਹਰ ਪ੍ਰਭ ਸਾਡਾ ਖਸਮ ਹੈ ਅਸੀਂ ਉਹਦੇ ਟਾੜੀ ਹੁੰਦਾ ਗੁਣ ਗਾਇਨ ਕਰਨ ਵਾਲਾ ਉਹਦੇ ਦਰ ਤੇ ਖੜ ਕੇ ਉਹਦੀ ਸੋਭਾ ਕਰਨ ਵਾਲਾ ਟਾੜੀ ਹੁੰਦਾ ਕੀ ਕਰਦੇ ਜਸ ਕਰਦੇ ਉਹਦੇ chant ਗਾਉਂਦੇ ਆ ਦੇਖਿਆ ਨਾ ساری ਗੁਰਬਾਣੀ ਚੰਦ ਤਰ੍ਹਾਂ ਦੇ ਬਣਾ ਕੇ ਰਾਗਾਂ 'ਚ ਗਾਈ ਹੋਈ ਹੈ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕੰਤਾ ਔਰ ਕਮਲਕੰਤ ਦੇ ਜਿਹੜਾ ਹਿਰਦੇ ਜਿਹੜਾ ਰਹਿਣ ਵਾਲਾ ਕੰਤਾ ਹੈ ਤੁੰਗਲਾ ਕੰਤਾ ਮੇਰੀ ਬੁੱਧੀ ਦਾ ਕੰਤਾ ਹੈ ਹੋ ਮੇਰੀ ਬੁੱਧੀ ਦਾ ਮਾਲਕ ਹੈ ਉਹ ਖਸਮ ਉਹਦੇ ਮਿੱਤੋ ਦੇ ਗੁਣ ਗਾਇਨ ਕਰਦੇ ਆ ਮਿੱਤੋ ਦਾ ਕੀਰਤਨ ਕਰਦੇ ਆ ਇਹ ਜਸ ਕਰਦੇ ਆ ਇਹ ਜਸ ਸੁਣਦੇ ਆ ਹੋਰ ਕੋਈ ਕੰਮ ਨਹੀਂ ਨਾ ਕਿਸੇ ਕਿਸੇ ਰੁਚੀ ਨੂੰ ਜੀਅ ਜੀ ਲੱਗਦਾ ਉਹਨੂੰ ਜੀਅ ਨਹੀਂ ਕਰਦਾ ਬੋਲਣ ਨੂੰ ਕੁਝ ਜੀਅ ਨਹੀਂ ਕਰਦਾ ਜੇ ਬੋਲਣ ਨੂੰ ਜੀ ਕਰਦਾ ਤਾਂ ਉਹਦਾ ਜਸ ਇਸ ਤੋਂ ਨਹੀਂ ਕਰਦਾ ਤੋਦਾ ਜਸ ਕਮਲ ਦੇ ਵਿੱਚ ਰਹਿਣ ਕਮਲ ਦੇ ਵਿੱਚ ਜਿਹੜਾ ਸਮਾ ਕਮਲ ਨੇ ਉਹ ਤੇ ਨਵਾਸ ਕਰਨ ਵਾਲੀ ਬੁੱਧੀ ਕਮਲ ਹੈ ਗੁਰਮੁਖੀ ਨੂੰ ਕਮਲ ਆਇਆ ਬਵੇਕ ਬੁੱਧੀ ਨੂੰ ਕਮਲ ਆਇਆ ਹੋਇਆ ਬਵੇਕ ਉਹਦਾ ਕੰਤਾ ਗਈ ਕਬੀਰ ਦਾ ਐਸਾ ਗੁਰ ਤੇ ਕਮਲਾ ਕੰਤਾ ਦਾ ਭਾਵ ਹੁੰਦਾ ਵੀ ਜਿਹੜਾ ਘਰ ਵਾਲੇ ਨੂੰ ਕੰਤ ਕਿਹਾ ਜਾਂਦਾ। ਗਿਆਨ ਦੇ ਬਿਨੂੰ ਬੰਦੀ ਕਾਹਦੇ ਜੋਗੀ ਵਿਚਾਰੀ। ਗਿਆਨ ਨਾਲੇ ਬੰਦੀ ਜਨੋ। ਮਿਹਿਆਂ ਕਮਲਾ ਕੰਤਾ ਫਿਰ ਦੋ ਹਿਰਦੇ ਦਾ ਜਿਹੜਾ ਕੰਤ ਹੁਕਮ ਹੈ ਜੀ। ਬਿਲਕੁਲ ਹੋਕ। ਸੱਚੇ ਠੀਕ ਹੈ ਜੀ। ਹਰ ਦਾਤਾ ਸਭ ਜਗਤ ਭਿਖਾਰੀਆਂ। ਮੰਗਤ ਜਨ ਜਨਤਾ ਦਾ ਕੋਈ ਅੱਗਾ ਦਾ ਦਾ ਸਭ ਕੋ ਦੇਵਨ ਹਲ ਬਾਕੀ ਸਾਰੇ ਅਸੀਂ ਉਹਦੇ ਤੋਂ ਸਾਰੇ ਆ ਸਾਰੇ ਉਹ ਤੋਂ ਮੰਗਦੇ ਆ ਤੇ ਕੁਝ ਨਾ ਕੋਈ ਸਾਰੇ ਆਦਮੀ ਗੱਲ ਹੈ ਅਰੇ ਠੀਕ ਹੈ ਜੀ ਹਰ ਦੇਵ ਦਾਨ ਦਇਾਲ ਹੋਏ ਵਿੱਚ ਪਾਥਰ ਕ੍ਰਮ ਜਨਤਾ ਉਹ ਕਲਪਿਤ ਜੀੜਿਆਂ ਨੂੰ ਵੀ ਤੂੰ ਦਿੰਦਾ ਕਰਮ ਜਿਹੜੇ ਪੈਦਾ ਵੀ ਤੇ ਵੀ ਬੇਰਕਾਰ ਸਾਨੂੰ ਦੱਸ ਦੇ ਨਾਮ ਦੀ ਦਾਤ ਦੇ ਹੈ ਮੇਰੀ ਘਰਾਕ ਨਾਮ ਹੈ ਫਿਰ ਮੈਂ ਮੈਨੂੰ ਦੇ ਦੇ ਖੜਾ ਦੇ ਤੇ ਜਿਹੜਾ ਮੈਂ ਜੱਕਦਾਗਾ ਜਿੱਦੋਂ ਉਹ ਉੱਤੇ ਦੇ ਜਨ ਨਾਮਕ ਨਾਮ ਤੇ ਆਇਆ ਗੁਰਮੁਖ ਧਨਵੰਤਾ ਜੇ ਨਾਨਕ ਨਾਮ ਤੇ ਆਇਆ ਜਿਹਨਾਂ ਨੇ ਨਾਮ ਤੇ ਆਇਆ ਗੁਰਮਖੋਖ ਤੁਹਾਨੂੰ ਅੰਤਰ ਹੋ ਗਏ ਜਦੋਂ ਉਹਨਾਂ ਦੇ ਭਗਤੀ ਦੇ ਪਠਾਰ ਭਗਤੇ ਤੇ ਨਾਮ ਧੰਨ ਦੇ ਦਿੱਤਾ ਉਹਨਾਂ ਨੂੰ ਦੀ ਮਾਤ ਦੇ ਵਿੱਚ ਰਤਨ ਜੋ ਮਾਨਕ ਭਰ ਦਿੱਤੇ ਗੁਣ ਮੇਰੇ ਗੁਣ ਨੇ ਮਤ ਵਿੱਚ ਰਤਨ ਜੋ ਆਹਰ ਨੇ ਉਹਨਕਾ ਜੇਕ ਸਿੱਖ ਸੁਣੀ ਜਿਹਨਾਂ ਨੇ ਸੁਣ ਲਈ ਸਿੱਖਿਆ ਗੁਰ ਦੀ ਉਹਨਾਂ ਦੀ ਮਤ ਵਿੱਚ ਰਤਨ ਜੋ ਆਲ ਦਰ ਕੇ ਗੋੜ ਭਰੇ ਗਏ ਉਹ ਧਨਵਾਨ ਕਰ ਦਿੱਤੇ ਜਿਸ ਇੱਕ ਪੜੀ ਸਮਾਪਤੀ ਹੈ ਜੀ